ਚਲੋਕ ਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਗਿਆਨੀ ਜਗ ਜੀਤਾ ਦੂਰ ਕਹੇ ਗਿਆਨੀ ਜਗ ਜਿੱਤ ਲਿਆ ਜਿਹਨੇ ਆਪਣਾ ਮੁੱਢ ਜਿੱਤ ਲਿਆ ਜਗ ਜਿੱਤ ਲਿਆ ਜਗ ਜੀਤਾ ਸਭ ਕੋਏ ਜਗ ਕੀ ਹੈ ਜਗ ਦੇਖ ਤੇ ਆਸੀ ਜਗ ਜਿੱਤਦੇ ਗਿਆਨੀ ਨੇ ਜਗ ਜਿੱਤਿਆ ਆਪਣਾ ਮਨ ਜਿੱਤਿਆ ਹਾਂਜੀ ਨੇ ਇੱਕ ਬੌਝਾਂ ਦੂਈ ਬੌਝ ਜਿੱਤ ਨੇ ਸਾਰਾ ਜੱਗ ਜਿੱਤਿਆ ਹਾਰਿਆ ਕੌਣ ਨਹੀਂ ਗਿਆਨੀ ਨੇ ਮਨ ਜਿੱਤਿਆ ਬਾਕੀ ਦੇ ਮਨ ਨਹੀਂ ਜਿੱਤ ਹੋਏ ਵਕਾਰ ਜਿੱਤੇ ਐ ਹੱਥ ਕਰੋ ਕਰੋ ਦੋ ਲੋਭ ਕਾਰਕ ਹਿੱਸਾ ਯਗ ਦਾ ਜਰਾਕਾਰੀ ਜਿਹੜੇ ਜਗਾਂ ਜੋੜ ਕੇ ਰੱਖਦਾ ਜਿਹੜੇ ਜਗ ਜਿੱਤਲ ਵੀ ਦਿੰਦਾ ਜੈਨੇ ਨੇ ਜਗ ਜਿੱਤਿਆ ਸਭ ਕੁਝ ਜਿੱਤ ਲਿਆ ਜਿਹੜੇ ਜਗ ਨੂੰ ਜਿੱਤਣ ਲਈ ਦੰਦੇ ਸੀ ਉਹ ਜਿੱਤਲੇ ਨਾਲ ਰਾਜਾ ਕਾਹੀ ਜਿੱਤਿਆ ਜਾਂ ਫੌਜ ਜਿੱਤਈ ਜਾਂ ਜਗ ਦੀ ਫੌਜ ਹੈ ਬਕਰ ਠੀਕ ਹੈ ਜੇ ਭਾਵੇਂ ਨਹੀਂ ਦਿੱਤੋਈ ਜੱਗਾਂ ਨੂੰ ਦਿੱਤੋ ਹੋਗਾ ਆ ਜਮਾ ਜਿੱਤਿਆ ਗਿਆ ਜੇ ਵਕਾਰ ਦਿੱਤੋਏ ਔਰ ਤੂੰ ਬਣ ਗਈ ਦੀ ਛੱਟ ਰਦੇ ਨਹੀਂ ਬਣਦੇ ਕਹਿੰਦਾ ਭਾਪ ਜਾਨੀ ਨੇ ਜੋ ਹੈ ਉਹ ਵਕਾਰ ਦਿੱਤਲੇ ਹੈ ਤੇ ਬਾਕੀ ਵਕਾਰ ਦਿੱਤਲੇ ਜੱਗ ਦੇ ਤਿਆਗ ਠੀਕ ਹੈ ਜੀ ਤੇ ਜੱਗ ਜੱਗ ਵਿੱਚ ਪਤਾ ਦੇਖੋ ਦੋ ਜੀ ਜਾਨ ਚੱਗ ਵਿੱਚ ਪਦਾਰਥ ਦੇ ਪਦਾਰਥਾਂ ਤੋਂ ਉਹ ਹੋ ਗਿਆ ਪਦਾਰਥਾਂ ਦੀ ਇੱਛਾ ਤੇ ਬਾਪੀ ਰਹਿਗੇ ਵਕਾਰ ਵਕਾਰ ਵੀ ਜਿੱਤਲੇ ਪਦਾਰਥ ਵੀ ਜਿੱਤਲੇ ਤੋਂ ਬਕਾਰ ਤਾਂ ਜਾਂਦਾ ਜਦ ਨਿਰਕਾਰ ਵੀ ਲੋਭ ਨਿਰਗਾਹ ਦੀ ਚੀਜ਼ ਦਨੋ ਕਰੋਧ ਨਿਰਗਾਹ ਦੀ ਚੀਜ਼ ਦਨੋ ਉਹ ਨਿਰਗਾਹ ਦੀ ਚੀਜ਼ ਦਨੋ ਸਾਕਾਰ ਉਹ ਨਿਰਗਾਹ ਦੋਏ ਕਿਸਮ ਨਾਲ ਜਾਗ ਜਿੱਤ ਲਿਆ ਜਿੰਨਾ ਜ ਦੋਏ ਕਿਸਮ ਨਾਲ ਜਿੱਤ ਹੋਇਆ ਮੈਂ ਤਾਂ ਜਗਦੀ ਜਿੱਤ ਹੋਇਆ ਤਾ ਮੋਨੇ ਹੋ ਕੇ ਬੋਲੇ ਨਹੀਂ ਬੋਲੀ ਹੋ ਗਿਆ ਬੋਲਣਾ ਨਹੀਂ ਤਾਂ ਆਸਾ ਤਰਿਨਾ ਮਾਣੀ ਹੈ ਮਾਹੀ ਮਾਮਾ ਤੇ ਤੇਰੀਆਂ ਦੋ ਅੱਤ ਬੈਠੀਆਂ ਚੱਬ ਲੱਗ ਜਲਦੀ ਹੈ ਜਦ ਨਾਲ ਆਵੇ ਨਾ ਚੱਬ ਗੱਲ ਦਸੀ ਹੈ ਕੱਲਾ ਹੋਰ ਨਾ ਨਹੀਂ ਗੱਲ ਵੱਲਦੀ ਸੰਸਾਰ ਛੱਡ ਕੇ ਚਲੇ ਜਾ ਹਾਲੀਏ ਤੇ ਜੱਗ ਨਹੀਂ ਜਿੱਤੇ ਆ ਸ਼ਾਵਾਂ ਜਿ ਚਲੀਆਂ ਕਿ ਜਿਹੜੀ ਜੱਗ ਜੀਤਾ ਸਭ ਕੋਈ ਨਹੀਂ ਤਾਂ ਫੇਰ ਜੜਨੇ ਚੇਤਨਾ ਜਿੱਤ ਲਿਆ ਕਿਉਂਕਿ ਉਹ ਵਿਕਾਰਾਂ ਦੇ ਥੱਲੇ ਦਬ ਗਿਆ ਹੈ ਜੀ ਜਿਨ੍ਹਾਂ ਕੋਲ ਗਿਆਨ ਸੀ ਉਹ ਚੇਤਨਾ ਨੇ ਤਾਂ ਜੜ੍ਹ ਪਰ ਆਪਣਾ ਕਾਬੂ ਪਾ ਲਿਆ ਸਰੀਰ ਨੂੰ ਲੋੜਾਂ ਜਾਂ ਸਰੀਰ ਦੀਆਂ ਲੋੜਾਂ ਅਲੱਗ ਸੀਆਂ ਬੋਧੀਆਂ ਇਛਾਵਾਂ ਅਲੱਗ ਸੀ ਬੜਾ ਬਣਦੀ ਇਛਾ ਸੀ ਦੁਨੀਆਂ ਦੀਆਂ ਵੜੀਆਂ ਦੀਆਂ ਇਛਾ ਸੀ ਇੱਕ ਹੋਰ ਪੱਖ ਹੈ ਜਾਂਦਾ ਦੋ ਪ੍ਰਕਾਰ ਦਾ ਜਾਂਦਾ ਦੋ ਪ੍ਰਕਾਰ ਦਾ ਜਿੱਤ ਲਿਆ ਇਕ ਜਿਹੇ ਨਾਮੇ ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ ਨਾਮੇ ਕਾਰਜ ਸਿੱਧਾ ਨਾਮ ਨਾਲੇ ਕਾਰਜ ਸਿੱਧ ਦੋਸਤ ਸਹਜੇ ਹੋਏ ਸੋ ਹੋਏ ਨਾਮ ਦੇ ਨਾਲ ਜੋ ਕੁਝ ਹੋ ਰਿਹਾ ਹੈ ਨਾਮ ਨਾਲੇ ਸਾਰੇ ਕਾਰਜ ਸਿੱਧ ਹੋ ਰਹੇ ਇਸ ਕਰਕੇ ਸਹਜੇ ਹੋਏ ਸੋ ਹੋਏ ਜੋ ਹੋ ਰਿਹਾ ਉਹਦੇ ਚ ਅਸੀਂ ਰੜਕਾ ਸਕਦੇ ਲੋੜ ਕੀ ਹੈ ਬਣ ਦੀ ਉਹਨਾਂ ਦਾ ਉਹੀ ਹੈ ਜੋ ਹੁਕਮ ਕਿ ਕਿ ਸੱਜੇ ਤੋਂ ਕੀ ਪਾਵੇ ਸੱਜੇ ਹੋਇਸੇ ਹੋਏ ਆਪਾਂ ਉਡਰੂ ਗਏ ਜੋ ਜੋ ਜੋ ਉੱਦ ਨਾ ਹੋ ਜਾਂਦੋ ਸੱਜੇ ਦਾ ਉਡਰੂ ਗਏ ਸਾਬਾ ਇਹ ਡਿਊਡਲਾ ਡਾਕਟਰ ਉੱਥੇ ਕਹਿੰਦਾ ਤੇਲ ਵੀ ਕਹਿੰਦਾ ਹਜਮ ਵਿੱਚ ਵੀ ਭੁਗਦਾ ਇਹ ਵੀ ਤਲਦਾ ਸਾਬਾ ਇਹ ਇਹ ਨਾਮ ਦਾ ਕਲਾਗੈ ਗਾਣ ਕਰੂਗਾ ਹਨਵੜੂ ਜੇ ਪਹਿਲੇ ਕਿਤੀ ਪਈ ਹਨੋ। ਆਪਣਾ ਜੱਤ ਨਹੀਂ ਕਰਦਾ। ਗੁਰਮਤ ਮਤ ਅਚਲ ਹੈ ਚਲਾਏ ਨਾ ਸਕੇ ਕੋਈ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਈ। ਗੁਰਮਤ ਮਾਤਾ ਜਲ ਹੈ ਜੇੜੀ ਗੁਰਮਤ ਦੀ ਇਹ ਚੱਲ ਨਹੀਂ ਇਹ ਨਹੀਂ ਜਲਦੀ ਨਹੀਂ ਅਡੋਲ ਇਹ ਤਾਂ ਚੱਲਿਆ ਉਹਨਾਂ ਦਾ ਪਤਾ ਨਹੀਂ ਕਿਹੜਾ ਗੁਰਮੁਖ ਚੱਲਿਆ ਅੱਛਾ ਕਾਸਵਾਰ ਕੇ ਉਹ ਭਾਈ ਸਰਦਾਰ ਦੀਆਂ 12 ਨੇ ਨਹੀਂ ਉਹਦੇ ਪਤਾ ਨਹੀਂ ਕਿਹੜਾ ਗੁਰਮੁਖ ਚੱਲਿਆ ਇਹ ਤਾਂ ਚੱਲ ਮਤ ਹੈ ਉਹ ਜਾਏ ਜੇ ਗੁਰਮੁਖ ਨੇ ਉਹ ਜਾ ਗੁਰਮੁਖ ਹੋਣਾ ਨਾ ਉਹਨਾਂ ਦਾ ਗੁਰਮੁਖ ਕੱਪੜੀ ਕਿਸਮ ਦਾ ਹੋਰ ਇਹਦਾ ਚੱਲਣਾ ਮਤ ਜਿੱਤੇ ਖੜੋਗੀ ਜਾ ਕੇ ਮੰਦਰ ਤੇ ਖੜੋਗੀ ਖੜੋਗੀ ਬਸ ਤੇ ਲੋਕ ਦਾ ਗਿਆਨ ਹੋ ਗਿਆ ਖੜੋ ਗਿਆ ਅਡੋਲ ਹੋ ਗਿਆ ਨਾ ਕੋਈ ਕੋਈ ਕੋਈ ਕੋਈ ਚਲਾਇ ਮਾਂ ਕਰ ਸਕਦਾ ਇਹਨੂੰ ਆਪਣੇ ਟਾਰਗੇਟ ਤੋਂ ਕੋਈ ਛਡਕਾ ਨਹੀਂ ਸਕਦਾ ਗੁਰਮਤਿ ਦਾ ਟਾਰਗੇਟ ਹੈ ਟਾਰਗੇਟ ਕੀ ਹੈ ਚਾਰ ਪਦਾਰਥ ਲੈਣੇ ਦੇ ਚਾਰ ਪਦਾਰਥਾਂ ਦਾ ਟਾਰਗੇਟ ਹੈ ਕੋਈ ਥੜਕਾ ਨਹੀਂ ਥੱਲਦਾ ਟਾਰਗੇਟ ਉੱਥੇ ਹੀ ਰਹੂਗਾ ਟਾਰਗੇਟ ਥੜਕ ਗਿਆ ਚੱਲ ਗਈ ਕਹਿੰਦਾ ਗਿਆ ਤਾਂ ਉਹ ਨਾਲੇ ਸੰਤ ਚੱਲ ਗਿਆ ਦੂਰ ਭਗਤਾਂ ਕਾ ਹਰੰਗੀਕਾਰ ਕਰੇ ਘਰ ਹੋਏ ਭਗਤਾਂ ਦਾ ਹਰ ਭਗਤਾਂ ਦਾ ਹਰ ਜਿਹੜਾ ਹੈ ਨਾ ਉਹ ਹੋਰ ਹੈ ਜਿਹੜੇ ਆ ਦੂਏ ਹਰ ਹੋਰ ਭਗਤਾਂ ਦਾ ਹਰ ਹੋਰ ਭਗਤਾਂ ਦਾ ਹਰ ਅੰਗੀਕਾਰ ਕਰੇ ਜਿਹੜੇ ਕਾਬੂ ਦੂਪ ਉਤਾਂ ਦਾ ਹਰ ਅੰਗੀਕਾਰ ਕਰ ਲਵੇ ਨਾ ਕਰੂ ਵੀ ਮੈਂ ਕਰੂਗਾ ਉਹ ਕੰਮ ਸਮਝ ਲਓ ਹੋਇਆ ਹੀ ਹੋਇਆ ਕੋਈ ਹੋਣਾ ਨਹੀਂ ਸਕਦਾ ਕਰੇ ਕਾਰਜ ਸੁਹਾਵਾ ਹੋਇ ਐਸਾ ਕਾਰਜ ਸੁਧਰ ਉੱਡ ਜੀ ਮਨਮੁਖ ਮੂਲੋਂ ਭੁਲਾਇਨ ਵਿੱਚ ਲੱਭ ਲੋਭ ਅਹੰਕਾਰ ਭੁਲਾਇਆ ਮਨਮੁਖ ਮਨ ਮਗਤਾ ਪਹਿਲੇ ਜਿੱਥੇ ਖੜੇ ਤੇ ਨਾ ਪਹਿਲੇ ਪੈਰ ਕੋਈ ਭੁਲੇ ਦੇ ਪਹਿਲਾ ਬਾਇਰੇ ਪੁੱਠੇ ਪਾਸੇ ਨੂੰ ਰਖ ਲਿਆ ਹੁਣ ਤਾਂ ਭੁੱਲ ਗਏ ਜਿੱਥੇ ਖੜੇ ਦੋਥੇ ਭੁੱਲ ਗਏ ਲੋਭ ਲਾਇਆ ਨਲ ਮੁਕ ਇਹ ਚੱਲੇ ਕਰਕੇ ਵਿੱਚ ਲੱਭ ਲੋਭ ਆਜੇ ਲੱਭ ਲੋਭ ਹੰਕਾਰ ਜਿੱਤੇ ਸੀਗੇ ਜਿਹੜੇ ਤੁਸੀਂ ਕਹਿੰਦੇ ਉਹ ਜੱਗ ਆਗੇ ਨਾ ਵਿੱਚ ਇਹ ਬੱਜਦੇ ਤੇ ਨਹੀਂ ਆਏ ਖੜੇ ਨੇ ਤੇ ਜੱਗ ਵਿੱਚ ਦਿੰਦੇ ਲੰਮੇ ਲੰਮੇ ਬਰਕੇ ਲਈ ਹੀ ਖੜੇ ਨੇ ਝਗੜਾ ਕਰਦੇ ਆਂ ਅੰਨ ਨਾ ਕਰੇ ਵਿਚਾਰ ਕਿਹੜਾ ਕਰਦੇ ਅੰਨਨ ਬੁਝਰੇ ਕਿਹੜਾ ਕਰਦੇ ਦੰਦਾਂਤ ਗੁਜਰਦੇ ਨੇ ਆ ਦੇਖ ਲੋ ਕੈ ਸਾਲ ਹੋ ਗਏ ਝਗੜਾ ਕਰਦੇ ਇਹਨੂੰ ਮਨ ਮੁਖਾਂ ਨੂੰ ਸਾਰੇ ਮਨ ਮੁਖੇ ਨੇ ਇਹਦੇ ਝਗੜਾ ਕਰਦੇ ਨੇ ਉਰਤੀ ਠੀਕ ਕੋਈ ਕਹਦਾ ਕੱਢਦੇ ਹੋ ਕੋਈ ਕਹਿੰਦਾ ਕੋਸ਼ ਕਰਦੇ ਹੋ ਕੋਈ ਕਹਿੰਦਾ ਜੀ ਇਹ ਜਿਹੜੀ ਅਰਾਧ ਵਾਲਾ ਕੋਈ ਕੁਝ ਕੋਈ ਕੁਝ ਕੋਈ ਕੁਝ ਇਹਾਂ ਦੇ ਸਾਲਾਂ ਦੇ ਸਾਲ ਗੁਜ਼ਰ ਗਏ ਝਗੜਾ ਕਰਦੇ ਆਂਦੇ ਇਹ ਸਾ ਨੇ ਜਿਹੜੇ ਝਗੜਾ ਕਰਦੇ ਨੇ ਨਾ ਦਿਨ ਰਾਤ ਗੁਜਲਦੇ ਨੇ ਉਹ ਮਨਮੁਖ ਨੇ ਮੁੱਢੇ ਹੀ ਬੁਲੇ। ਕੀ ਹੁੰਦੀ ਆ ਕੋ ਗੁਰਮਤ ਅਡੋਲ ਹੁੰਦੇ। ਅਕਾਲ ਫਰਕਤੂ ਜਿਹੜੇ ਗੋਸਖ ਨੇ ਢੋਲ ਨਾਲ ਝਗੜ ਉਹਦੀ ਹਿੰਦੇ ਨਾਲ ਕਹੇ ਤੇ ਜੋ ਬਰਜੀ ਬਕਵਾਸ ਕਰੀ ਜਾਂਦੇ ਇਹ ਜਿਹਨਾਂ ਬਰਜੀ ਜੋਰ ਲਾਈ ਜਾਂਦੇ ਉਹ ਢੋਲ ਖੜੇ ਨੇ ਉਹ ਕਿ ਮੈਨੂੰ ਜਾਣਗੇ ਹਾਂਜੀ ਝਗੜਾ ਕਰਦੇ ਆਂ ਦਿਨ ਗੁਜ਼ਰੇ ਸ਼ਬਦ ਨਾ ਕਰਾਂ ਵਿਚਾਰ ਕਰਦੇ ਗੁਰਬਾਣੀ ਵਿਚਾਰਦੇ ਹੀ ਨਹੀਂ ਠੀਕ ਹੈ ਅਦੇ ਗੁਰਬਾਣੀ ਵਿਚਾਰ ਲਾਉਣਾ ਉਹਨੂੰ ਲੈ ਕੇ ਆਉਣਾ ਇਧਰੋਂ ਹੋ ਵੀ ਨਹੀਂ ਹਾਂਜੀ ਜਦ ਬਾਰ-ਬਾਰ ਕਹਿੰਦੇ ਪਹਿਲਾਂ ਗੁਰਬਾਣੀ ਵਿਚਾਰੋ ਤੇ ਬਾਅਦ ਗੱਲ ਕਰੋ ਇਧਰੋਂ ਹੋ ਵੀ ਨਹੀਂ ਜੀ ਸ਼ੁੱਧ ਮਤ ਕਰਤਾ ਹਿਰ ਬੋਲਣ ਸਭ ਵਿਕਾਰ ਇਹਨਾਂ ਨੂੰ ਸ਼ੁੱਧ ਮਤ ਦੇਣਾ ਵੜੀ ਮੋਟੀ ਪਹਿਲਾਂ ਤਜਬੇ ਸੀ ਉਹ ਕਰਤੇ ਕਰਤੇ ਨੇ ਉਹ ਵੀ ਹੋਲੀ ਉਹਨਾਂ ਤੇ ਫੌਜੀ ਦੇ ਲੈ ਲਏ ਨਾ ਨੇ ਪਹਿਲਾਂ ਹੀ ਲੈ ਲਈ ਉਹਨਾਂ ਤੇ ਇਹਨਾਂ ਨੇ ਕੋਠੇ ਕੰਬਦੇ ਕਰ ਲੈਣ ਤੇ ਇਹਨਾਂ ਦੀ ਅਸਲੀ ਗੱਲ ਲੈ ਲਓ ਲਾ ਕੇ ਕੰਮ ਕੋਈ ਹੁਦਾਂ ਕਰੇ ਨਾ ਦੇਣ ਹੈ ਠੀਕ ਹੈ ਜੀ ਦੇਖੋ ਯਾਰ ਕੋਈ ਅਸਰ ਕਰਤੇ ਪਹਿਲ ਜਾਬੇ ਨਾ ਸ਼ੁੱਧ ਮਤ ਕਰਤੇ ਹੀ ਯੁੱਧ ਮਤ ਕਰਤੇ ਹਿਰ ਲਈ ਬੋਲਣ ਸਭ ਵਿਕਾਰ ਜਿਹੜਾ ਬੋਲਦਾ ਸਭ ਤੇ ਕੇ ਮਰ ਗਿਆ 10 ਸਾਲ ਹਸਪੋਗ ਟੱਟ ਕੇ ਮਰ ਗਿਆ 10 ਸਾਲ ਆਖਰ ਕਹਿੰਦਾ ਮੈਂ ਤੁਹਾਨੂੰ ਇਕੱਲਾ ਹੀ ਰਹਿ ਗਿਆ ਕਿਸੇ ਤੇ ਪਈਆਂ ਸਨ ਜਿਹੜੇ ਕੁਝ ਆਦਮੀ ਨਾਲ ਲੱਗੇ ਤੇ ਉਹ ਵੀ ਡੁੱਟ ਗਏ ਉਹ ਗਾਲਾਂ ਕੱਢਦੇ ਕਿ ਕਿਤੇ ਨਾ ਸੰਤੋਖੀ ਅੰਤਰ ਬਹੁਤ ਅਗਿਆਨ ਅੰਧਾਰ ਕਿਤੇ ਕਿਤੇ ਨਾ ਸੰਤੋਖੀ ਹਨ ਜੇ ਉਹਨਾਂ ਨੂੰ ਕੋਈ ਦੇਵੀ ਦਈਏ ਸੰਤੋਖੀ ਹੋਣਾ ਨੂੰ ਜੋ ਪ੍ਰਾਪਤੀ ਹੁੰਦੀ ਹੈ ਸੰਸਾਰ ਦੇ ਵਿੱਚ ਕੁਝ ਉਹਨਾਂ ਨੂੰ ਜੋ ਉਹਨਾਂ ਨੂੰ ਮਿਲਦਾ ਗਿਆਨ ਜਿਹੜਾ ਉਹ ਲੈ ਰਹੇ ਨੇ ਗਿਆਨ ਇਹ ਮਾਇਆ ਜਿਹੜੀ ਉਹਨਾਂ ਦੀ ਭੁੱਖ ਹੈ ਉਹਦਾ ਨਾ ਸੰਤੋਖ ਨਹੀਂ ਉਦੋਂ ਸੋ ਦੁਖੀ ਹਨ ਉਤਰ ਤਿਕਨਾ ਬਹੁਤ ਅ ਗਿਆਨ ਉਧਾਰ ਉਹਨਾਂ ਦੇ ਅੰਦਰ ਪ੍ਰੇਸ਼ਨਾ ਗਿਆਨਤਾ ਰੇਰਾ ਬਹੁਤ ਬੜਾ ਗਿਆਨ ਹੈ ਉਹ ਦੀ ਜੇ ਗਿਆਨ ਹੁਜਾ ਤਾ ਕੋਈ ਗਿਆਨ ਦੀ ਗੱਲ ਦੱਸ ਦੇ ਕੁਰਬਾਨੀ ਉਹ ਅਰਥਾਦੰਦ ਚੁੱਪ ਕਰਕੇ ਆਪੇ ਲੋਕ ਬੁੱਝ ਲੈਂਦੇ ਉਹਨਾਂ ਦੀ ਬਾਕੀ ਗੱਲ ਬਾਕੀ ਗੱਲ ਪਿੱਛੋਂ ਕਰਦੇ ਪਹਿਲਾਂ ਗੁਰਬਾਣੀ ਦੇ ਅਰਥ ਆ ਕੇ ਦੱਸ ਦਿੰਦੇ ਕਿ ਭਾਈ ਗੁਰਬਾਣੀ ਦੇ ਅਰਥ ਐ ਜੀ ਬਾਅਦੀਆਂ ਗੱਲਾਂ ਦਾ ਬਾਅਦ ਚ ਕਰ ਲੈਂਦੇ ਕਿਦਾਂ ਗੁਰਬਾਣੀ ਸਾਡੇ ਗੱਲ ਪਾਸ ਆ ਹੋ ਗਿਆ ਹੋਰ ਬਾਕੀ ਗੱਲ ਪਿੱਛੋਂ ਕਰ ਲੈਂਦੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਲੈ ਦੇਖੋ ਤਸਕੇ ਉਹ ਸਾਰਕਤ ਗੱਲ ਦੱਸ ਕੇ ਵਿਸ਼ਵਾਸ ਦਿੱਤਾ ਲੈ ਦੇ ਪੱਲੇ ਦਾ ਥੋੜੇ ਕੱਖ ਦੀ ਕੀ ਕਹੇ ਨਾਨਕ ਮਨਮੁਖਾਂ ਨਾਲੋਂ ਟੁੱਟੀਆਂ ਭਲੀ ਜਿਹਨਾਂ ਮਾਇਆ ਮੋਹ ਪਿਆਰ ਇਸ ਕਰਕੇ ਇਹ ਜਿਹੜੇ ਨਾ ਗੱਲਾਂ ਕਰੀਦੇ ਹਾਂਜੀ ਜਿਹੜਾ ਦੁੱਧ ਦੇ ਦੋਲ ਦਿਓ ਇਹਨਾਂ ਦੇ ਵੀ ਤੁਸੀਂ ਨਹੀਂ ਸਿੱਖੋ ਸਿੱਖ ਨਾ ਬਥੇਰੇ ਬਣ ਜਾਣਗੇ ਕੁਰਬਾਨੀ ਵੀ ਕਹਿੰਦੀ ਹੈ ਇਹਨਾਂ ਨੂੰ ਸੁਤੀ ਭਲੀ ਨੇ ਤੋੜੀ ਹੈ ਜੋੜੀ ਦੀ ਦੁਆਰਾ ਮੁੜ ਕੇ ਰਾਮ ਰਹੀਏ ਤੇ ਧੀਰ ਬੰਦੀਏ ਤੇ ਵੀੜੇ ਤੇ ਮਸਾਨ ਤੇ ਸ਼੍ਰੀਕੰਤਗੇ ਤੇ ਉਹ ਵੇਰੇ ਸਾਰੇ ਇੱਦਾਂ ਡਿਗੜਾ ਆ ਦੁੱਧ ਪਹਿਲਾਂ ਲਈ ਕਿਹੜਾ ਟੁੱਟੀ ਚੰਗੀ ਐ ਕਿ ਕਿਹਨੂੰ ਖਰਾਬ ਕਰ ਸਕਦੇ ਨੇ ਸਿੱਖੀ ਨੂੰ ਤਾਂ ਸਿੱਖੀ ਦਾ ਨਾਲ ਬਰਦਾਸ਼ਤ ਐ ਨਹੀਂ ਪਹਿਲਾਂ ਤਾਂ ਹੀ ਬਰਦਾਸ਼ਤ ਨਹੀਂ ਨਾਨਕ ਮਨ ਮੁੱਖਾਂ ਟੁੱਟੀਆਂ ਭਲੀ ਜਿਨ੍ਹਾਂ ਮਾਇਆ ਮੋਹ ਪਿਆਰ ਯਾਰੋ ਮਾਇਆ ਮੋਹ ਪਿਆਰ ਜਿਹਨਾਂ ਦਾ ਗੁਜ਼ਾਰਾ ਰੋ ਰੱਲੇ ਵਿੱਚਣਾ ਕੰਮੇ ਘੜਿਆ ਨਹੀਂ ਦੁਕਾਨੀ ਗੱਲ ਨਹੀਂ ਇਹਦੇ ਇਹਨਾਂ ਗੁਟਕੇ ਦੀ ਨੇ ਗ੍ਰੰਥੇ ਵੇਚਣਾ ਨੇ ਬਿਜ਼ਨਸ ਵਧਾਇਆ ਹੋਇਆ। ਸਰੂ ਨੂੰ ਤਾਂ ਦਾ ਬਣਾ ਉਹਨਾਂ ਦੀ ਟੁੱਟੀ ਬਣੀ ਆ ਉਹ ਦੇਦਣ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿੰਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ। ਇਹਨਾਂ ਪਉ ਸੰਸਾ ਕੀ ਕਰੇ ਉਹਨਾਂ ਨੂੰ ਪਉ ਜਲ ਉਹਦਾ ਕੀ ਵਿਗਾੜ ਸਕਦਾ ਜੇ ਸਤਗੁਰੂ ਫੇਰ ਕਰਤਾਰ ਇਹਦੇ ਸਤਗੁਰੂ ਔਰ ਕਰਤਾਰ ਪੈ ਕੀ ਕਰਨਗੇ ਦੇ ਡਰ ਪੈ ਕੀ ਕਰਨਗੇ ਉਦੋਂ ਸੀਗੇ ਕਿ ਉੱਥੇ ਵੇਲੇ ਸ਼ੁਰੂ ਹੋ ਗਏ ਸੀ ਕਬ ਪਹਿਵੇਂ ਪਾਸ਼ਾ ਨੂੰ ਤਾਂ ਜਦੇ ਸ਼ਰੀਰ ਕਰੇ ਦਿੱਤਾ ਹਾਂਜੀ ਥੱਲ ਬਾਅਦ ਪਹਿਲਾਂ ਗੱਲ ਵੀ ਸੀ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਉਹ ਜਿਹੜੀ ਚਰਚਾ ਚੱਲ ਰਹੀ ਸੀ ਬਾਹਰ ਉਹਦਾ ਜਵਾਬ ਦੇ ਰਹੇ ਨੇ ਬੰਦੀ ਦੇ ਵਿੱਚ ਠੀਕ ਹੈ ਜੀ ਬਹੁਤ ਸੰਸਦ ਆ ਕੀ ਕਰ ਸਾਨੂੰ ਨਹੀਂ ਦੱਸਿਆ ਕਿਸੇ ਦਾ ਸੰਸਦ ਸੰਸਦ ਲੈ ਕੇ ਉਹਨੇ ਗੱਲਾਂ ਉਹਨਾਂ ਦਾ ਜਵਾਬ ਲਿਖਿਆ ਹੋਇਆ ਠੀਕ ਹੈ ਠੀਕ ਹੈ ਐ ਸੰਸਦ ਸਾਹਿਬ ਫਾ ਫਿਰ ਤੇ ਮੜਰਾਉਂਦਾ ਜਵਾਬ ਲਿਖ ਰਹੇ ਨੇ ਸਰਕਾਰ ਨੂੰ ਡਾਰ ਦਾ ਹੱਥ ਹੈ ਤੁਹਾਡਾ ਧਾਰਾ ਸੰਸਾਦ ਕੀ ਉਗਾ ਡੂਗਾ ਆਪਣਾ ਜਿਹੜਾ ਜੋ ਲਾਓ ਠੀਕ ਹੈ ਆਪੇ ਰੱਖਣ ਹਾਰ ਤੁਰਦਨ ਕੀ ਪੈਜ ਰੱਖਦਾ ਆਦੀ ਤੋਰ ਬਰਗਾ ਪੈਜ ਰੱਖਦਾ ਆਪੇ ਰੱਖਣ ਹਾਲ ਰ ਜਿਹੜਾ ਕੈਦ ਉਹ ਰੱਖਦਾ ਪੈਜ ਰੱਖਦਾ ਬਹੁਤਾ ਨਹੀਂ ਮਚਾਉਣਾ ਲਖਿਆ ਸ੍ਰੀ ਲੱਗਦਾ ਇਹ ਨਹੀਂ ਕਿਹਾ ਮੈਂ ਰੱਖਦਾ ਪਿਆਜ਼ ਕੀ ਰੱਖਦਾ ਮੈਂ ਢੋਲਣ ਨਹੀਂ ਦਿੰਦਾ ਉਹਨਾਂ ਦਾ ਮੈਂ ਢੋਲਦਾ ਨਹੀਂ ਪਿਆਜ਼ ਰੱਖਣ ਦਾ ਮਤਲਬ ਹੈ ਸਿਰ ਦੇਣ ਦੇ ਸੱਚ ਦੇ ਉੱਤੇ ਕੁਰਬਾਨੀ ਦੇਣ ਸੱਚ ਦੇ ਉੱਤੇ ਢੋਲ ਦੇ ਦੀ ਈ ਰੱਖਣਾ ਔਰ ਕੁਝ ਨਹੀਂ ਠੀਕ ਹੈ ਜੀ ਗੱਲ ਨਹੀਂ ਨਹੀਂ ਹੈ ਢੋਲ ਰਹਿਣਗੇ ਢੋਲ ਅਣੋਲ ਜਾਣੇ ਪੈ ਜਾਣੀ ਹੈ ਹਾਂਜੀ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਉਹ ਤਾਂ ਪ੍ਰੀਤਮ ਨੂੰ ਭਿਲੇ ਨਹੀਂ ਸੁਖ ਪਾਇਆ ਹੋਇਆ ਤੇ ਰਹਨੇ ਨਹੀਂ ਸੱਚੇ ਸ਼ਬਦ ਨਾਲ ਪਿਆਰ ਹੈ ਗੁਰਬਾਣੀ ਨਾਲ ਪਿਆਰ ਹੈ ਠੀਕ ਹੈ ਜੀ ਨਾਨਕ ਸੁਖ ਸੇਵਿਆ ਆਪੇ ਪਰਖਣ ਨਾਨਕ ਸੁਖ ਦਾਤਾ ਆਪੇ ਪਰਖਣ ਉਹਨਾਂ ਤੋਂ ਸੁੱਖ ਦਾਤਾ ਸੇਵਿਆ ਸੁੱਖ ਦੇਣੇ ਇਹ ਸਰਕਾਰ ਨੇ ਕੁਝ ਨਹੀਂ ਕਰਨਾ ਇਹ ਬਕਵਾਸ ਕਰਦੀ ਹੈ ਸਰਕਾਰ ਪਰ ਖੜਾ ਤੋਂ ਉਹਨੇ ਸਾਤਾ ਸੱਚ ਜੇ ਆਰੀ ਜਲੀ ਤਾਂ ਫਰਕ ਪਰਮਿਸ਼ਰ ਕਰਦੇ ਹੁਕਮ ਹੁਕਮ ਨਾ ਹੁੰਦੀ ਜਲਦੀ ਆਰੀ ਪਰ ਧੋਨੇ ਰਹਿਣੀ ਸਾਡੀ ਸੱਚੇ ਝੂਠੇ ਦੀ ਦੁਨੀਆ ਉਹਦੇ ਦੇਖੋਣ ਵੀ ਇਹੋ ਜਿਹੇ ਹੁੰਦੇ ਨੇ ਬੱਸ ਉਹ ਦੁਨੀਆਂ ਦਾ ਦਾ ਸ਼ੰਕਾ ਕਰਨੀ ਵੀ ਇਹੋ ਜਿਹੇ ਹੁੰਦੇ ਨੇ ਭਗਤ ਆਪੇ ਪਰਖਣਾ ਕਰਖਣ ਲੱਗਦਾ ਨਾ ਉਹ ਤੁਸੀਂ ਤਾਂ ਐ ਮੂੰਹ ਦੇ ਬਗਾਮੀ ਦੇ ਮੂੰਹੇ ਬਣੇ ਹੋ ਬਗਾਮੀ ਦੌੜੀਏ ਤੁਹਾਨੂੰ ਤਾਂ ਪਰਖਾ ਉਹਨੇ ਆਪੇ ਦੁਨੀਆਂ ਨੂੰ ਤਸੱਲੀ ਦਿਉਣੀ ਊਂਗਾੜਾ ਦੌੜਾ ਕਰਦੇ ਠੀਕ ਹੈ ਜੀ ਔੜੀ ਜੀ ਜੰਤ ਸਭ ਤੇਰੀਆਂ ਤੂੰ ਸਭਨਾ ਰਾਸ ਕਿਛ ਨੂੰ ਤੂੰ ਦੇਂ ਤਿਸ ਸਭ ਕਿਸ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਜੀ ਜੰਤ ਸਭ ਤੇਰੀਆਂ ਆ ਕਿੰਨੇ ਜੀਵ ਜੰਤੂ ਆ ਸਭ ਨੇ ਇਹ ਆਤਮਾ ਮਾ ਸਭ ਤੇਰੀਆਂ ਨੇ ਜੀ ਜੰਤ ਸਭ ਤੇਰਾਉ ਗੋਡੇ ਤੂੰ ਸਭਨਾ ਰਾਸ ਤੂੰ ਸਭਨਾ ਰਾਸ ਸਭਨਾ ਸਾਦੀ ਦੇ ਦੀ ਰਾਸ ਸਭਨਾ ਰਾਸ ਜੋ ਦੇ ਰਹੇ ਬਾਜ਼ਾਰ ਦੇ ਰਹੇ ਆਪਣੇ ਕੋਲ ਰਾਸ ਜਿਹੜੇ ਦੇ ਰਹੇ ਸਭਨਾਂ ਨੂੰ ਜੋ ਰਾਸ ਦੇ ਰਹਿਆ ਤੂੰ ਹੀ ਦੇ ਰਿਆ ਰਾਸ ਵੀ ਤੇਰੀ ਪਦਾਰਥ ਵੀ ਤੇਰੇ ਠੀਕ ਹੈ ਜੀ ਜਿਸ ਨੂੰ ਤੂੰ ਦੇਹ ਤਿਸ ਸਭ ਕਿਸ ਮਿਲੇ ਕੋਈ ਹੋਰ ਸ਼ਰੀਕ ਨਹੀਂ ਤੁਧ ਪਾਸ ਜੇ ਤੁਹਾਨੂੰ ਕੋਈ ਹੈ ਇਸ ਸਮ ਜਿਸ ਮਲੇ ਜਿਹਨੂੰ ਦੇਰ ਮਾਨਾ ਸਭ ਕੁਝ ਹੋ ਜਾਂਦਾ ਕੋਈ ਹੋਰ ਸ਼ਰੀਕ ਨਹੀਂ ਤਦ ਪਾਸ ਕੋਈ ਸ਼ਰੀਕ ਨਹੀਂ ਤੇਰਾ ਹੈ ਜਿਹੜਾ ਕਹਿੰਦੇ ਮਾਲਾ ਦੋ ਜੀ ਆ ਦੋ ਉਹ ਟਮਾ ਨਾ ਕਹਦੀ ਬੁੱਢਾ ਸੁਣਦਾ ਤੇ ਸ਼ਰੀਕ ਨਹੀਂ ਤੇਰੇ ਜਿੱਡਾ ਕੋਈ ਜਿਹੜਾ ਤੇਰੀ ਜਿਹੜਾ ਤੇਰੀ ਮਰਜ਼ੀ ਨੂੰ ਥੱਲ ਦੇਵੇ ਜਿਹੜਾ ਤੇਰੀ ਮਰਜ਼ੀ ਜਿਹੜਾ ਸਭ ਸਵਾਲ ਦੇ ਸਕੇ ਜੀ ਤਾਂ ਤੇਰੀ ਇੱਛਾ ਨੂੰ ਬਦਲ ਦੇ ਤੇਰਾ ਸ਼੍ਰੀਕ ਦੀ ਕੋਈ ਜਿਹਨੂੰ ਦੇਣਾ ਚਾਹੇ ਦੇ ਨੀ ਹੈ ਤੇਰੀ ਬਦਲ ਸਕਦੀ ਬਰਾਬਰ ਦੇ ਨੇ ਸ਼੍ਰੀਕ ਬਰਾਬਰ ਦੇ ਹੁੰਦੇ ਦੋ ਇੱਕ ਪੈਰਾਂ ਦੂਆ ਦੂ ਉਹ ਤੇ ਦੇ ਬਰਾਬਰ ਦੇ ਹੁੰਦੇ ਨੇ ਕੀ ਕਹਿਸ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸ ਦੀ ਤੁਧ ਦੀ ਤੂੰ ਮੰਨ ਲੈ ਤੋ ਜਨ ਸ਼ਹਾਬ ਹੁਕਮ ਦਾਤਾ ਸਰਬਦਾ ਸਾਹਾਂ ਦਾ ਕੋਈ ਦਾਤਾ ਤੂੰ ਕਿਸੇ ਅਰਦਾਸ ਇਸ ਕਰਕੇ ਤੇਰੇ ਅੱਗੇ ਅਰਦਾਸ ਹੈ ਜਿਸ ਦੀ ਤੂੰ ਭਾਵੈ ਕਿਸ ਤੂੰ ਬੋਲਣਾ ਹੈ ਜਿਹਦੀ ਗੱਲ ਤੂੰ ਤੈਨੂੰ ਚੰਗੀ ਲੱਗਦੀ ਹੈ ਉਹਦੀ ਗੱਲ ਬੋਲ ਲੈਣਾ ਜਿਹਦੀ ਗੱਲ ਜੰਦੀ ਲੱਗਦੀ ਹੈ ਜਿਹੜੀ ਗੱਲ ਚੰਗੀ ਲੱਗਦੀ ਹੈ ਉਹਦੀ ਗੱਲ ਤੂੰ ਬੋਲ ਲੈਣਾ ਜੇ ਦੀ ਭਗਤੀ ਦੇ ਵਿੱਚ ਨਹੀਂ ਲੱਗਦੀ ਆ ਉਹਦੀ ਭਗਤੀ ਬਣ ਲੈਣਾ ਸੋ ਜਾਣਾ ਸ਼ਾਬਾਸ਼ ਉਹ ਜਾਂਦੇ ਸ਼ਾਬਾਸ਼ ਹੈ ਜਿਹਦੀ ਗੱਲ ਤੂੰ ਬੋਲ ਲੈਣੇ ਠੀਕ ਤੇਰਾ ਚੋਜ ਵਰਤਦਾ ਦੁਖ ਸੁਖ ਤੁਧ ਪਾਸ ਸਭ ਤੇਰਾ ਚੋਜ ਵਰਤਦਾ ਇਹਦਾ ਚੋਜ ਹੈ ਤੇਰਾ ਵਰਤਦਾ ਦੁੱਖ ਸੁਖ ਤੁਧ ਸਾਰਾ ਤੇਰੇ ਕੋਲ ਜਾਂ ਦੁੱਖ ਸੁਖ ਤੇਰੇ ਕੋਲ ਹੈ ਤਤੀ ਤੇ ਦਵੀ ਬੈਠੇ ਵਾਲੇ ਨੂੰ ਦੁੱਖ ਦਿੰਦਾ ਹੀ ਛੱਡਦਾ ਹੀ ਨਹੀਂ ਉਹ ਤੇ ਦੁਖਾੜੀ ਢਾਲੀਓਂ ਬੰਦ ਬੈਠਾ ਉਹ ਮੋਤਨ ਵਾਲੀ ਬੰਦ ਹੈ। ਦੁਖਾੜੀ, ਸੁਖ ਸੁਭਾਤੇਰੇ ਤੇ ਵਿਸ਼ਵਾਸ ਹੈ ਉਹਨਾਂ ਦਾ ਧਰਮ ਤੇ ਵੀ ਤਤੀ ਕਵੀ ਤੇ ਕਿਵੇਂ ਬੈਠ ਜਾਂਦੇ ਨੇ। ਉਹਦੇ ਵਿੱਚ ਚੱਲਦਾ ਉਹਨਾਂ ਦੀ ਦੀ ਟੂਟੀ ਛੱਡੀ ਹੋਈ ਹੈ ਉਹ ਤਾਂ ਹੋਈ ਹੈ। ਹੋਲੀ-ਹੋਲੀ ਹੋਈ ਲੋਕਾਂ ਨੂੰ ਦੁੱਖ ਲਾ ਰਿਹਾ ਉਹ ਨੂੰ ਸੁਭਲਾ ਮਨ ਕੀ ਮਿਲਦਾ ਹੈ ਨਾ ਐਸੀ ਗੱਲ ਹੈ ਕੁਰਬਾਨੀ ਦੀ ਉਲਟੀ ਫੁੜੀ ਇਹ ਕਾਹਦੀ ਸਮਝ ਆਉਂਦੀ ਹੈ ਪਾਸ ਝੁਗ ਪਾਸ ਇਹ ਗੱਲ ਤਾਂ ਸਹੀ ਦੇ ਅੱਗ ਦੇ ਵਿੱਚ ਪਾ ਦੇ ਅੱਗ ਹੋ ਸਕਦਾ ਪੱਖੋਂ ਮੈਥੇ ਇਹ ਤਾਂ ਮਾਇਆ ਹੈ ਮਾਇਆ ਤੋਂ ਭਰੇ ਦੀ ਗੱਲ ਹੈ ਮਾਇਆ ਦਾ ਇਹ ਨਾ ਕੰਦੂਰੂ ਹੈ ਮੈਚ ਮਾਇਆ ਨਹੀਂ ਮੈਚ ਕਰਦੀ ਕਿਤੇ ਵੀ ਇਹ ਠੀਕ ਹੈ ਜੀ ਹਾਂਜੀ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ